हां जी आ, हो रयो गंग बहाईए दुनियाई आखे की नानक ईश्वर जगनाथ उचहदी वैन वैण वीर क्यों तो अपने सत्ते दी शुरू उ नी बलवान दी बॉडी तगे पहले समाप्त हो गई ठीक है जी सुर सत्ता फेर गुणनाथ को शुरू करता है, है। हां हो रयो गंग बहाईए ਜੋ ਵਿਚਾਰਤਾ ਰਾ ਚੱਲ ਰਹੀ ਸੀ ਨਾ ਜਿੰਦੂ ਵੱਤ ਸੀ ਹਾਂਜੀ ਜਿੰਨੀਆਂ ਵੀ ਮਤਲਬ ਅ ਹਿੰਦੂ ਵੱਤ ਵਿੱਚ ਵੱਟਾ ਦੇ 54 ਦੇ ਦੁਆਦੇ ਵਿੱਚ ਠੀਕ ਹੈ ਜੀ ਹਾਂ ਉਹਦਾ ਫੀਰ ਸਦੇ ਨੇ ਬ੍ਰਾਹਮਣੀ ਵੱਤ ਹੈ ਤੇ ਜੋਗੀ ਵੀ ਨੇ ਇਹਨਾਂ ਨਾਲ ਇੱਕ ਵੱਖਰੀ ਕਿਸਮ ਦੀ ਗੱਲ ਕਰ ਰਹੇ ਆ ਠੀਕ ਹੈ ਤੇ ਦੰਦਾ ਕਹਿੰਦੇ ਥੱਲੇ ਨੂੰ ਜਾਂਦੀ ਆ ਬਾਹਰ ਤੋਂ ਹਾਂਜੀ ਕਬੀਰ ਵੀ ਕਹਿ ਰਿਹਾ ਉੱਠੀ ਦੰਦਾ ਜਾ ਰਹੀ ਆ ਉੱਠੀ ਜਾ ਰਹੀ ਆ ਉੱਪਰ ਤੋਂ ਜਾ ਰਹੀ ਆ ਆਕਾਸ਼ ਨੂੰ ਇਹ ਗੱਲਾਂ ਕਰ ਰਹੀ ਆ ਆਕਾਸ਼ ਕੀ ਗੱਲਾਂ ਠੀਕ ਹੈ ਜੀ ਜਿਵੇਂ ਬੱਦਲ ਸੁਬਤੋਂ ਜਿਵੇਂ ਆਖੇ ਇੱਥੇ ਵਰਸ ਚਾਹੁੰਦੇ ਨੇ ਉਹਨੇ ਸੱਜਿਆ ਜਾਂਦਾ ਜੀ ਇੱਦੋਂ ਪਾਣੀ ਉੱਡ ਕੇ ਉਸੇ ਰਸਤੇ ਵਾਪਸ ਜਾਣਾ ਤੂੰ ਦੱਸ ਦੇ ਵਿੱਚ ਇਹਨਾਂ ਦਾ ਪਾਣੀ ਜਾਂਦਾ ਧਰਤੀ ਦੇ ਉੱਤੇ ਵੀ ਅੱਛਾ ਜੀ ਜੀ ਜਿੱਥੇ ਅਸੀਂ ਪਹੁੰਚਣਾ ਠੀਕ ਜਿਹੜਾ ਖਾਰੀ ਉੱਚੇ ਤੇ ਉੱਚਾ ਬਗਵੰਤਾ ਨਾ ਹਾਂਜੀ ਉੱਚੇ ਤੇ ਉੱਚੇ ਬਗਵੰਤ ਕੋ ਪਹੁੰਚਣ ਵਾਸਤੇ ਇਹਨਾਂ ਨੂੰ ਦੂਜੀ ਹੈ ਚਲਦੇ ਜਾਂਦਾ ਇਹ ਗੰਗਾ ਵੋਦੀ ਵੀ ਰੁਈ ਜਾਂਦੀ ਵੀਰੂ ਜਾਂ ਤਾਂ ਨਰਕ ਨੂੰ ਜਾਂਦੀ ਹੁੰਦਾ ਇਹ ਉੱਚਾ ਜਾਣਾ ਅਵਸਥਾ ਉੱਚੀ ਹੁੰਦੀ ਹੈ ਇਹਨਾਂ ਉੱਚੇ ਧਿਆਨ ਉੱਚਾ ਇਹ ਉਲਟੀ ਗੰਗਾ ਧਿਆਨ ਗੰਗਾ ਉਲਟੀ ਹੁੰਦੀ ਹੈ ਪਾਣੀ ਦੀ ਵੀ ਤਾਂ ਉਲਟ ਲੋ ਉਲਟੀ ਹੁੰਦੀ ਹੈ ਹੋਰੋਂ ਗੰਗਾ ਵਾਹਿਆ ਹਾਂ ਜੀ ਵਿਹਾਈ ਹੈ ਦੁਨੀਆਈ ਅੱਖੇ ਕੀ ਕਿਉਂ ਦੁਨੀਆ ਕਹਿੰਦੀ ਹੈ ਇਹ ਕੀ ਜਾਂਦਾ ਮੇਰਾ ਸਾਰੀ ਉਹ ਗੱਲ ਉਲਟਾ ਜਿਵੇਂ ਹੁਣ ਆ ਹਾਂਜੀ ਅਜੇਾ ਹੁਣ ਤੀਕਾ ਆਪਾਂ ਆਖਰਕਾਰ ਪਾ ਲਿਆ। ਮੈਨੂੰ ਤੁਹਾਨੂੰ ਬਿਲਕੁਲ ਨਹੀਂ ਉੱਟਣੀ। ਵੀ ਇਹ ਆ ਤੁੰਦੇ ਦੇ ਨਾਲ ਖੜੀ ਇਹ ਲੋਕ ਕਹਿਦੇ ਹੁੰਦੇ ਕਿ ਦੂਜਿਆਂ ਪੱਤਾ ਨਾ ਵੇਲੇ ਨਹੀਂ ਹੁੰਦਾ ਇਹਦਾ। ਜਦੋਂ ਗੁਰਬਾਨੀ ਅਰਥਾਈ ਗਈ ਹੈ ਤੇ ਜਿਹੜਾ ਇਹ ਜੋਗੀਆਂ ਦਾ ਜੋਗ ਦਰਸ਼ਨ ਉਹ ਸਾਰੇ ਫਾਰਮੂਲੇ ਲਾ ਕੇ ਦਿਖਰ ਨਹੀਂ ਲਾ ਕੇ ਇਹ ਵੀ ਦਿਖਿੰਦੀ ਲਾ ਕੇ ਠੀਕ ਹੈ ਉਹ ਜ਼ਿਆਕਾਰੀ ਪਾਰੀ ਬਣਾਤੀ ਠੀਕ ਹੈ ਜੀ ਕਰਦੇ ਆ ਤਾਂ ਦੁਨੀਆ ਨੂੰ ਲੱਗਦਾ ਹੈ ਕਿ ਜਦੋਂ ਦੇ ਤਾਂ ਹੋ ਰਹੀ ਗੱਲ ਕਰ ਰਹੇ ਨੇ ਇਹ ਤਾਂ ਨਹੀਂ ਸਾਰੀਓ ਪੁੱਠੀ ਘਰਤੀ ਇਹ ਸਾਰੀ ਗੱਲ ਹੈ ਉਹ ਪੁੱਠੀ ਤਾਕਤਾਂ ਦੀ ਬਾਤ ਰੋਈ ਬਾਤ ਉਲਟੀ ਹੈ ਉਲਟੀ ਰਹੇਗਾ ਉਲਟੀ ਰਹੇ ਸਾਤ ਫਿਰ ਕਰ ਉਲਟੀ ਜਿਹੜੇ ਰੋਗ ਦੇ ਬੰਦੇ ਨੇ ਆਦਮੀ ਕੁਝ ਕਰ ਸਕਦਾ ਹੈ ਆਦਮੀ ਕਰਪ ਕਰਦਾ ਹੈ ਪੁੱਧ ਕਰਦਾ ਹੈ ਪਾਪ ਕਰਦਾ ਹੈ ਉਹ ਸਾਖਤਾ ਦੀ ਅਵਸਥਾ ਨਹੀਂ ਪਰਮਤ ਕਹਿੰਦੀ ਹੈ ਪਾਪ ਪੁੱਲ ਫਰੇ ਬਸਣਾ ਜੀ ਮਤਲਬ ਹੋਰੇ ਹਾਂਜੀ ਪਾਪ ਪੁੱਲ ਤਾਂਹੀ ਕਹਾਵਤ ਕੋ ਨਰਕ ਬਹੁ ਸੁਰਗ ਬਣਛਾਵਤ ਜਿਹੜੇ ਪਾਪ ਪੁੱਲ ਪਾਪ ਪੁੱਲ ਜੇ ਬੀਜਦੇ ਤੇ ਸਭ ਧਰਮ ਨਾਲੇ ਤੇ ਜਾਵੇ ਧਰਮ ਨਾਲੇ ਉਹ ਬੰਦੇ ਨੇ ਦੀ ਗੱਲ ਕਰਦੇ ਨੇ ਬਾਪੂ ਨੂੰ ਬੰਦਦੇ ਨੇ ਫਜ਼ਲਤ ਰਜ਼ਾ ਨਾਜ਼ਰ ਹਰੀ ਦੀ ਕੋਈ ਰੌਲਾ ਨਾ ਦੇਣੀ ਸੱਜਾ ਰਸਤਾ ਹੀ ਹੋ ਰਿਹਾ ਹੈ ਮਾਇਆ ਤਾਂ ਬਹਾਲਾ ਰੱਖਦਾ ਹੈ ਠੀਕ ਸੰਤਨ ਦੁਹਾਰੀ ਜਿਹੜੇ ਰਸਤੇ ਦੇ ਵਿੱਚ ਮਾਰਗ ਦੇ ਵਿੱਚ ਵਿਦਿਆਪੀ ਜਿਹੜੇ ਬਤਾਵੇ ਇਹ ਪੁਹਿਹਾਰੀ ਲੁੱਟੀ ਗਈ ਸੀ ਹਰ ਵਾਰ ਲੁੱਟਿਆ ਜਾਂਦਾ ਇੱਕ ਟੁਕੜਾ ਨਾਮ ਹੁੰਦਾ ਨਹੀਂ ਇਹਦੇ ਕੋਲ ਠੀਕ ਹੈ ਜੀ ਉੱਤਰਾ ਹੋਰ ਬਹੁਤ ਕੁਝ ਹੁੰਦਾ ਠੀਕ ਹੈ 1000 ਕੇ ਨਾਮ ਤੇ ਅੱਗੇ ਲਈਏ ਖੋਏ ਉਹ ਬਨਿਆੜੀ ਤੋਂ ਖੋਦੇ ਦਿੱਤੇ ਸਾਰੇ ਬੋਰਡਰ ਸੀ ਹਮ ਹਮ ਤੇ ਹਰ ਵਕਤ ਸਭ ਕੋ ਖੋ ਰਹਿਦੇ ਤੇ ਰਸਤਾ ਹੀ ਹਰਪਾਂਗੇ ਤੇ ਰਸਤਾ ਖਾਲਸਾ ਧਿਆਰਾ ਰਸਤਾ ਹੈ ਹੋਰਿਓ ਗੰਗਾ ਹੋਰਿਓ ਗੱਗ ਬਹਾਈਏ ਬਹਾਈਏ ਜੀ ਬਹਾਈਏ ਬਹਾਈਏ ਹੋਰੇ ਗੰਗ ਇਹ ਨਵੀਂ ਵਿਚਾਰ ਇਹ ਜਬ ਉਹ ਨਾਮ ਬਦਲਦਾ ਧਿਆਨ ਦਮੀ ਭਗਤੀ ਹੈ ਇਹਨੂੰ ਕਹਾਂਗੇ ਦਮੀ ਭਗਤੀ ਈਸਰ ਜਗਨਾਥ ਉਚ ਹੱਦੀ ਈਸਰ ਜਗਨਾਥ ਦੇ ਜਿਹੜੇ ਬੈਣ ਨੇ ਜਿਹੜੇ ਅਟਾਰੇ ਨੇ ਅਸਰ ਦੇ ਬਿਤਾ ਈਸਰ ਜਗਨਨਾਥ ਦੇ ਬੰਨ ਨੇ ਇਸਨੂੰ ਉਜਾਲਣ ਕੀਤਾ ਤੇ ਅੱਛਾ ਜੀ ਇਸ ਸਰ ਜਲਾ ਉਜਾਲਣ ਇਸ ਨੂੰ ਇਸਰ ਪਰਮਾ ਦੇਵੀ ਹਾਂਜੀ ਜਦੋਂ ਇਸਰ ਪਰਮੇਸ਼ਰ ਬਣ ਜਾ ਜਿਹੜਾ ਵਜਣ ਦਾ ਪਰਮੇਸ਼ਰ ਦਾ ਅੱਛਾ ਜੀ ਵਜਣ ਪਰਮੇਸ਼ਰ ਦਾ ਤੇ ਜਿਹੜਾ ਬੋਲ ਰਿਹਾ ਹੋਈ ਇਸਰ ਅੱਛਾ ਜੀ ਨਾਨਕ ਕਾਹਨੂੰ ਇਸਰ ਕਿਹਾ ਹੈ ਸਿਹਾਰੀ ਕੋਲੋਂ ਲੈ ਸਾਰੇ ਠੀਕ ਹੈ ਈਸ਼ਰ ਤੇ ਸਿਹਾਰੀ ਆ ਪਰ ਜਿਹੜਾ ਈਸ਼ਰ ਅਖਰੇ ਇਹਦੇ ਤੇ ਸਿਹਾਰੀ ਆ ਜੀ ਇਹ ਸਤਗੁਰ ਹੈ ਇਹ ਸਤਗੁਰ ਹੈ ਜਿਸ ਦੀ ਬਾਣੀ ਆ ਉਹ ਗੁਰੂ ਹੈ ਠੀਕ ਹੈ ਜਗਨਾਤ ਸਿੰਘ ਉਹ ਚੱਦੀ ਉੱਚੀ ਹੱਦੀ ਕੀ ਹੈ ਹੱਦ ਹੱਦ ਤੋਂ ਉੱਚੇ ਹੱਦ ਤੋਂ ਵੀ ਉੱਚੇ ਉੱਚੀ ਹੱਦੀ ਆ ਆ ਤੋਂ ਪਰੇ ਦੇ ਅੱਛਾ ਜੀ ਆਨਾਦ ਠੀਕ ਹੈ ਜੀ ਐਸਾ ਉਹ ਉਹ ਜਿਹੜੇ ਬੈਲ ਨੇ ਆਨਾਦ ਲਿਆ ਉਹ ਐ ਨਹੀਂ ਹੈ ਉਹ ਸਰਪਿਆਪੇ ਠੀਕ ਪਰੇ ਦੀ ਬਣੀ ਹੈ ਵਾਇਆ ਹੱਦ ਦੇ ਅੰਦਰ ਦੀ ਹੋ فیر کیوںن دا کی مطلب ہے جی فیر کیوںن دا وہ شબ્દ ہے نا وہ سربیاپی ہے تے فیر کیوںن دے کی ارتح ہے جی ہاغبندی وی نہیں ہے او اچھا جی ایک ਪਰ ਜਿਹੜਾ ਵਿਰਕਿਉਣ ਅਖਰ ਇਹ ਕੋਈ ਅਰਬੀ ਭਾਸ਼ਾ ਦਾ ਹੈ ਕਿਸੇ ਹੋਰ ਭਾਸ਼ਾ ਦਾ ਨਾ ਨਾ ਇਹ ਤਾਂ ਆਪਣੀ ਦੇ ਵਿੱਚ ਠੀਕ ਹੈ ਜੀ ਉਹਨਾਂ ਦੇ ਨਾਲੇ ਫਿਰ ਤੁਹੋਂ ਸ਼ਬਦ ਰਿੜ ਕਿਉਂ ਆਹ ਦੇਖੋ ਹੁਣ ਉਹ ਗੱਲ ਕਹੇ ਤੀਜਾ ਸਬੁੱਧਨ ਕਰਨ ਵਾਲੀ ਗੱਲ ਆਹੀ ਸਬੁੱਧ ਲੜਕਿਆ ਹੋਰ ਸਬੁੱਧ ਸਬੁੱਧ ਕੋਈ ਦੇਵਤਿਆਂ ਦੀ ਲੜਕਿਆ ਰਾਖਸ਼ਾਂ ਨੇ ਓਏ ਬਾਹਰ ਨੇ ਤਾਂ ਇਹ ਲੜਕਿਆ ਹੈ ਇਹ ਲੜਕੇ ਗੱਲ ਦੱਸੀ ਆ ਸੰਸਾਰੀ ਸੱਚ ਦੱਸਿਆ ਸੰਸਾਰੀ ਸੱਚ ਮੈਚ ਕਰਕੇ ਬਿਰਾਕਾਰੀ ਸੱਚ ਦੱਸਿਆ ਅੱਛਾ ਲੋਕ ਦਾ ਧਿਆਨ ਹੈ ਤੇ ਲੋਕ ਦਾ ਧਿਆਨ ਵਿੱਚੇ ਇਹ ਲੋਕ ਦਾ ਗਿਆਨ ਹੈ ਚੌਥੇ ਦਾ ਤਾਂ ਆਇਆ ਉੱਥੋਂ ਦਰਗਾਹ ਚ ਤੇ ਲੋਕ ਦਾ ਨਾਮ ਕੋਈ ਗਿਆਨ ਦਰਗਾਹ ਜੀ ਨੇ ਸਾਰਾ ਕੁਝ ਤੇ ਲੋਕ ਦੀ ਗੱਲ ਕਰ ਰਹੀ ਹੈ ਇਹ ਮਾਧਾਣਾ ਕੀ ਹੋਇਆ ਜੀ ਮਾਧਾਣਾ ਪਰਬਤ ਕਰ ਇਹ ਕੀ ਹੈਗਾ ਇੱਥੇ ਮਤਲਬ ਪਤਾਨੀ ਦੇ ਨਾਲ ਕੋਈ ਹਾਂਜੀ ਮਾਧਾ ਹਾਂਜੀ ਬੇਦੰਦ ਫਿਰ ਉੱਪਰ ਬਸਾ ਹਾਂ ਹਾਂ ਸਮਾਗ ਦਾ ਬਦਾਨਾ ਕਰਕੇ ਨਾਲ ਬੁੱਧੀ ਚਲਦੀ ਹੈ ਬੁੱਧੀ ਖਲੋਦੀ ਹੈ ਉਹਨੂੰ ਠੀਕ ਹੈ ਜੀ ਸਮਾਗ ਦੀ ਵੀ ਲੋੜ ਹੈ ਸਮਾਗ ਹੀ ਹੈ ਸਭ ਕੁਝ ਹਾਂ ਦੀ ਲੋੜ ਜ਼ਰੂਰ ਹੈ ਤੇ ਥੱਲੇ ਚਾਪੀ ਬੁੱਧੀ ਹੈ ਹਿੰਦੇ ਵਿੱਚ ਠੀਕ ਹੈ ਜੀ ਇਸ ਕੁਈ ਸ਼ਬਦ ਸਜੋਈਏ ਹਰਕਾ ਬਲੋਬਣਾ ਬਲੋਬੋ ਵੀ ਨੇ ਭਾਈ ਸਹਜੇ ਬਲੋਬੋ ਜੈਸੇ ਸੱਤ ਲੁਜਾਈ ਹਾਂਜੀ ਹਰਕਾ ਬਲੋਬਣਾ ਕੀਆ ਹਰਕਾ ਬਰੋਲਣਾ ਗੁਰ ਸ਼ਬਦ ਕਾ ਵਿਚਾਰਾ ਗੁਰ ਪ੍ਰਸਾਦੀ ਬਾਦ ਐ ਬਲਤਾਰਾ ਠੀਕ ਹੈ ਮਟਕੀ ਹਿਰਦੇ ਵਿੱਚ ਪਾਇਆ ਇਸ ਮਟਕੀ ਵਿੱਚ ਸ਼ਬਦ ਸਜੋਈ ਆ ਜਿਹੜੀ ਬਾਣੀ ਐ ਭਾਈ ਐ ਹਿਰਦੇ ਵਿੱਚ ਠੀਕ ਹੈ ਜੀ ਉਹਦੇ ਜੋ ਖੰਡ ਕਰਦੇ ਉਹ ਜੋ ਕੱਢਿਆ ਸਾਰਾ ਉਦੋਂ ਸਿਆ ਕੇ ਮਾਧਾਣਾ ਨੇ ਸਾਡੀ ਬਾਣੀ ਸੱਤੇ ਆਪ ਰੜਕ ਕੇ ਆ ਦੱਸਿਆ ਜਿਹੜਾ ਆਪਣੀ ਉਹ ਗੱਲ ਕਰ ਰਿਹਾ ਸੱਤਾ ਬਲਬਲ ਬਲਬਲ ਅੱਛਾ ਜੀ ਸੱਤਾ ਐਵੇਂ ਗੁਰਨਾਮ ਕੰਦੇ ਕੀਤੀ ਸੀ ਦੀ ਬਾਣੀ ਰੜਕ ਸੀ ਠੀਕ ਹੈ ਜੀ ਐਵੇਂ ਅੰਦਰ ਦੇ ਕੀਤੀ ਸੀ ਬਾਣੀ ਸਮਝ ਕੇ ਅਰਥਾ ਨਵੀਂ ਗੱਲ ਕਹੀ ਸੀ ਉਹ ਜਿਹੜੀ ਪਹਿਲੀ ਗੱਲ ਆ ਉਸੇ ਨੂੰ ਸਮਝ ਕੇ ਉਸੇ ਨੂੰ ਅਰਥਾਈ ਦਾ ਹੁੰਦਾ ਫਿਰ ਹਰੇ ਕੀ ਗਰੀਬ ਬਾਸਾ ਕੀ ਹੁੰਦਾ ਜੀ ਬਾਸਾ ਬੰਦਾ ਤਪ ਅੱਛਾ ਤਾਂ ਨੇਤਰਾ ਕੀ ਹੁੰਦਾ ਜੇ ਇਹਦੇ ਪਰ ਕੋਈ ਨੇਤਰਾ ਤਾਂ ਹੁੰਦਾ ਜੀ ਨਾਲ ਰਲਕੀਦਾ ਜਿਹੜਾ ਉਹ ਪਾਇਆ ਹੋਇਆ ਜਿਹੜਾ ਸੇਸ ਨਾਲ ਗਿਆ ਨਾਲ अच्छा जी माने ठीक है 32 गुट्टी ਦਾ ਬੰਨ ਠੀਕ ਹੈ ਜੀ ਅਸਲ ਵਿੱਚ ਉਹ ਆ ਗੱਲ ਸੀ ਨੇ ਜਦੋਂ ਬਣਾਤੀ ਜਦ ਉਹ ਗਈ ਪਰਬਤ ਬਣਾਤਾ ਮੇਰ ਦਾੰਡਾ ਸਰ ਉੱਪਰ ਮੇਰ ਪਰਬਤਾ ਪਰਬਤ ਠੀਕ ਹੈ ਜੀ ਦਾੰਡਾ ਮੇਰ ਸਹੀ ਰੱਖੋ ਟਕਰਾ ਤੇ ਮੇਰ ਸਹੀ ਰਹਿਦਾ ਨੂੰ ਇਹਨਾਂ ਵਿਦਵਾਨ ਵਿਦਵਾਨਾਂ ਦੇ ਹਾਂ ਜੀ ਆਏ ਤੋਂ ਬਾਅਦ ਗਈ ਪੱੜਸ ਪਾੜੀ ਬਾੜ ਪੱੜ ਨੇ ਵਿਦਵਾਨਾਂ ਨੇ ਮੋਰਖਾ ਦੇ ਬਾਅਦ ਹੀ ਜਵਾਬ ਨਹੀਂ ਦੇ ਸਕਲਾ ਠੀਕ ਹੈ ਜੀ ਕੀ ਜੀ ਕਾਹਨੇ ਕਰਦਾ ਕਿਹਨੇ ਕਰਦਾ ਵਿਮਾਰ ਬਣਾ ਇਹਦਾ ਮਤਲਬ ਬੁੱਧੀ ਦਾ ਅਸੀਂ ਬਣਾਇਆ ਵਿਧਾਨਾ ਤੇ ਮਨ ਨੂੰ ਬਾਸ਼ਕ ਵਾਂਗ ਵਰਤਿਆ ਜੀ ਜੀ ਬਾਬਿਆ ਜਿਹੜਾ ਹੈ ਨਾ ਮਾਧਾਨਾ ਪਰਬਤਕਰ ਨੇਤਰਵਾਸਕ ਕਰਿਓ ਵੀ ਇਹ ਕਹਾਣੀ ਕੀ ਚੱਲਦੀ ਆ ਰਹੀ ਹੈ ਤੇ ਇੱਥੇ ਕਿਹੜੇ ਪਰਸਾਏ ਗੱਲ ਆਪਾਂ ਵਰਤਦੇ ਆਂ ਪਿੱਛੋਂ ਹੈ ਆਗਾ ਨੇ ਰਾਜਾ ਨੇ ਅੱਛਾ ਜੀ ਹੁਣ ਸੁਮندر ਆ ਜਿਹੜਾ ਆਪਣਾ ਹੈਗਾ ਲੜਕਿਆ ਜਾ ਸਕਦਾ ਹਾਂਜੀ ਬਣਾ ਲਈ ਅੱਛਾ ਜੀ ਫੋਟੋ ਬਣਾ ਤੀ ਕਿਹਦੇ ਨੇ ਹੋਊਗੀ ਹਾਂਜੀ ਜਦੋਂ ਗੋਤਲਵਾਲਾ ਨੇ ਆਪਰੇ ਉਹ ਪੇਰੀ ਦੀ ਤਲਵਾਰ ਦੇਣਾ ਤਾਂ ਸੀ ਉਹਦੀ ਵੀ ਲੋਹੇ ਦੀ ਬਣਾਤੀ ਜਦੋਂ ਅਸੀਂ ਫੋਟੋ ਬਣਾਉਂਦੇ ਹਾਂ ਤਾਂ ਨੂੰ ਯਾਦਾ ਅਸੀਂ ਸਾਹਕਾਰੀ ਬਣਾਉਣ ਲੱਗ ਜਾਂਦੇ ਤਾਂ ਦਲਤੀਓ ਪਹਿਲਾ ਹੋ ਜਾਂਦੀ ਉਹ ਦਸ ਤੀ ਕੀ ਦੀ ਅੱਛਾ ਜੀ ਉਹ ਠੀਕ ਹੈ ਹੋ ਹੀ ਨਹੀਂ ਸਕਦਾ ਠੀਕ ਹੈ ਜੀ ਵੀ ਉਹਨਾਂ ਨੇ ਉਹ ਖਾਨ ਹੀ ਬਣਾਈ ਐ ਵੀ ਮਾ ਦਾਣਾ ਜਿਹੜਾ ਹੈਗਾ ਉਹ ਪਰਬਤ ਦਾ ਬਣਾ ਲਿਆ ਤੇ ਜਿਹੜੇ ਜਿਹੜੇ ਗਿਆਨ ਤੇ ਅੱਛਾ ਜੀ ਸੋਹਣੀ ਨਾ ਗਮੇਰ ਪਰ ਬਤਾ ਸਮਾਹ ਰੂ ਗਿਆ ਹੋਇਆ ਅੱਛਾ ਜੀ ਉਹ ਨਵਾਦ ਦਾ ਇਸਤੇਮਾਲ ਕੀਤਾ ਬੁੱਧੀ ਬੁੱਧੀ ਭਰਾਨੀ ਬਣੀ ਅੱਛਾ ਜੀ ਨਵਾਦ ਦਾ ਇਸਤੇਮਾਲ ਹੋਇਆ ਅੱਜ ਵੀ ਡੰਡਾ ਹੁੰਦਾ ਤਾਂ ਕਰਕੇ ਜਿਹੜਾ ਮਾਨ ਇਹ ਨੂੰ ਗਿਆ ਰਸੀ ਵੰਗੂ ਰਿਹਾ ਛੱਡ ਕੇ ਨਹੀਂ ਗਿਆ ਕਦੇ ਸੋਚਿਆ ਨਹੀਂ ਐ ਬੰਦ ਕਰਦਾ ਮਾਨ ਅੱਛਾ ਪੂਰੀ ਹਾਂਜੀ ਬੋਲ ਜ ਵਿੱਚ ਹਾਂਜੀ ਕਾਹ ਰੜ ਕੋ ਹੋਇਆ ਠੀਕ ਹੈ ਜੀ ਠੀਕ 14 ਛੌਧਾਰ ਅੰਦਰ ਵਿਖਾ ਲਿਆ 14 ਹਰ ਨਾ ਮਤਲਬ ਇਹ ਦੀ ਹੈਗਾ ਹਾਂਜੀ ਛੌਧਾਰ ਅੰਦਰ ਨਾ ਛੌਧਾ ਲੋਕ ਨੇ ਸਾਡੇ ਕੋਲ ਬੰਦੇ ਹੋਏ ਛਾਤ ਰ ਅੱਛਾ ਜੀ ਛੌਧਾ ਲੋਕ ਦਾ ਗਿਆਨ ਵਿਖਾ ਗਾ ਲਿਆ ਬਸ ਅੱਛਾ ਜੀ ਉਹ ਤੇ ਲੋਖਰੇ ਉਹ ਗਾ ਕੀ ਵੀ ਹੈ ਕੰਨਾ ਪਰੇ ਕੋ ਬੋ ਬਜਾ ਖੰਵੇ ਤੇ ਲੋਕ ਦਾ ਧਿਆਨ ਇਹਨਾਂ ਨੇ ਬੰਦ ਕਰ ਦੇ ਲੇ। ਉਸ ਤੇ ਲੋਕ ਦਾ ਆਪਣੇ ਵੀ। ਹਾਂਜੀ ਹਾਂਜੀ ਤੇ 14 ਦਾ ਕੀ ਹੋਰ ਭਾਵ ਬਣਦਾ ਤੁਸੀਂ ਦੱਸ ਰੇ ਸੀ। ਉਹ ਨਾਲ ਨਾਲ ਹੈ। ਤੇ ਸਰਕਾਰ ਦੇ ਵਿੱਚ ਬਹੁਤ ਕੁਝ ਹੈ। ਠੀਕ ਹੈ ਜੀ। ਪਰ ਸਰਕਾਰ ਕਿਵੇਂ ਪੈਦਾ ਹੋਇਆ? ਪੈਦਾ ਹੋਇਆ? ਜਵਾਬ ਤੇ ਗੱਲ ਹੋਈ। ਹਾਂ ਜੀ। ਕੁਰਬਾਨੀ ਜੇ ਜਵਾਬ ਹੈ। ਠੀਕ ਹੈ। ਜੇ ਜਵਾਬ ਕੁਰਬਾਨੀ ਵੀ ਇਸ ਤਰੀਕਾ ਹੋਇਆ ਜਵਾਬ ਹੈ ਕੋਈ ਕੋਈ ਹੈਗਾ ਇਹ ਕੁਰਬਾਨੀ ਕਨੇ ਵੀ ਸੁਖਣਾ ਆ ਗਿਆ ਹੋਵੇ। ਅੱਛਾ ਜੀ। ਠੀਕ ਹੈ ਜੀ। ਸੀ ਹੋ ਗਈ ਲਿਖਣਾ ਸੀਗਾ ਹੋਰ ਐ ਜੇ ਵੀ ਕੋਈ ਗੱਲ ਕਰਦੇ ਹੁੰਦੇ ਜਿਹੜੀ ਪਹਿਲਾਂ ਹੋਵੇ ਨਾ ਉਹ ਤਾਂ ਕਟੋਵਰਸੀ ਮੈਗ ਹੋ ਜੂਗੀ ਠੀਕ ਹੈ ਜੀ ਹੋ ਤਾਂ ਉਹ ਲੈਣਾ ਬੋਲਦਾ ਨੇ ਵੀ ਲਿਖਿਆ ਹੋਇਆ ਪਾਣੀ ਸੀ ਉੱਤੇ ਚਟਾਈ ਪਛਾਤੀ ਕਿਸੇ ਨੇ ਖੋਜ ਲਿਆ ਕਿਸੇ ਨੇ ਖੋਜ ਲਿਆ ਹਾਂ ਹੁਣ ਅੱਜ ਲੋਗ ਇਹ ਦੇਖਦੇ ਨੇ ਬਈ ਜਦ ਸਹੀ ਖੋਜ ਆਵੇ ਉਹਦੇ ਬੇੜੇ ਖੜੀ ਕੀ ਜਾ ਪ੍ਰੀਤ ਕੋਦੇ ਅਕਾ ਤੁਹਾਨੂੰ ਜਿੱਦਾ ਖਰੀ ਖੜੀ ਰਾਜਨਾ ਦੀ ਗੱਲ ਹੈ ਜਿੱਸੇ ਤੱਕ ਦੇਖੋ ਸਾਲਾਂ ਦੇ ਵਿੱਚ ਮਾਇਆ ਦੀ ਖੋਜ ਹੋ ਰਹੀ ਹੈ ਹਾਂਜੀ ਮਾਇਆ ਬਾਰੇ ਜੋ ਗਿਆਨ ਗੁਰਬਾਣੀ ਦਾ ਉਸੇ ਦੀ ਘੋਟੀ ਸ ਹੈ ਬਤਲਵਾ ਹੈ ਨਹੀਂ ਗਿਆਨ ਦੀ ਘੋਟੀ ਸ ਨਹੀਂ ਹੈ ਜਿਹੜਾ ਸਾਰ ਵਰਤ ਦਾ ਸਹੀ ਕੋਈ ਨਹੀਂ ਹੈ ਹਾਂਜੀ ਤੇ ਲੋਕ ਕਹਿੰਦੇ ਗੁਰਬਾਣੀ ਨੂੰ ਖੋਜ ਦੀ ਘੋਟੀ ਦੇ ਮਾਇਆ ਮਾਇਆ ਵਾਲੀ ਗੱਲ ਪਰ ਹੋਊਗੀ ਦੂਜੀ ਦੀ ਪਰ ਹੈ ਤੁਸੀਂ ਵਾਰੇ ਦਾ ਡੀਜੀਟਾ ਟੈਕਨੀਕ ਰੋਜ ਕਰੀ ਗਈ ਹੈ ਪੈਨ ਉਹਦਾ ਪਛਾਈ ਨਹੀਂ ਹੈ ਸਾਡਾ ਵੀ ਹੈ ਜਿਹੜਾ ਇਹਦੇ ਘਰੇ ਕਿਹਾ ਦੋ ਆਯਾ ਵਾਰੇ ਕੋ ਜਿਹੜਾ ਚਣ ਵਾਰੇ ਜੋ ਕਿ ਅੱਛਾ ਜੀ ਸਰ ਬਗਰਾ ਸਾਡੇ ਉਹ ਸੈਂਸ ਟਿਕਨੋਜੀ ਦੇ ਪਰਖ ਦੀ ਗੱਲ ਹੈ ਠੀਕ ਹੈ ਉਹ ਗੱਲ ਬਾਇਾਨ ਹੋਇਆ ਪਰ ਉਹ ਕਹਿੰਦੇ ਨੇ ਮੈਂ ਜਿਹੜੀ ਫੈਨਟੀ ਗੱਲ ਦੀ ਗੱਲ ਕੋ ਕਰ ਰਹੀ ਹੈ ਨਹੀਂ ਖਰੀਦੀ ਉੱਤਰ ਦੀ ਮਾਇਆ ਦੀ ਦੂਜੀ ਕੀ ਬਤਰੂ ਇਹ ਵੀ ਗੱਲ ਠੀਕ ਹੈ ਹਾਂਜੀ ਹੋਈਏ ਤਾਂ ਜੇ ਖਾਣੇ ਆ ਉਹਦੇ ਬਾਰੇ ਉਹਦਾ ਗਿਆ ਮੇਰੇ ਸਹੀ ਹੋ ਜਾਊਗਾ ਠੀਕ ਹੈ ਦੀ ਕੋਈ ਕਮੀ ਨਹੀਂ ਹੈ ਤੇ ਠੀਕ ਹੈ ਜੇ ਸਾਹਮਣੇ ਜਿਉਂ ਸਾਹਮਣੇ ਦਿੱਤਾ ਪਰੇ ਜਮ ਲੈ ਜੂਗਾ ਹਾਂਜੀ ਖਾਦ ਤੇ ਇਹ ਜਿਹੜੇ ਹੈਗੇ ਫਿਰ ਹੁਣ 14 ਰਤਨ ਦਾ ਆਪਾਂ ਮੇਨ ਭਾਵ ਕੀ ਲਵਾਂਗੇ ਕੀ ਤੈਨ ਲੋਕਾਂ ਦਾ ਗਿਆਨ ਆਹ ਤੈਨ ਲੋਕ ਦਾ ਗਿਆਨ ਰਟਨ ਗਿਆਨ ਦੇ ਹੁੰਦਾ ਗਿਆਨ ਰਟਾ ਦੋ ਫੈਲੀ ਦੋ ਅੱਛਾ ਜੀ ਨਿਕਾਲਿਆਂ ਕਰ ਯਾਰ ਬੜੀ ਵਰਦੀ ਰਹੀ ਹੈ ਅੱਛਾ ਜੀ ਉਹ ਆਪਾਂ ਤੇ ਇਹਦਾ ਭਰਮ ਚੱਪਿਆ ਚਲ ਕਰਨ ਦਾ ਹਨਾ ਜਿਹੜਾ ਜਬਰਦਸਤ ਕਾ ਭਰਮ ਗਿਆ ਕੋ ਸਾਖੀ ਜਾਂਦੀ ਹੂੰ ਜਬਰਦਸਤ ਇਹ ਭਰਮ ਸੀ ਦੂਰ ਕੀਤਾ ਚੱਲ ਕੇ ਹੁੰਦਾ ਬਗੜ ਚੰਪਾਤਾ ਵੀ ਭਾਈ ਤਾਂ ਭਾਈ ਜੀ ਬਤਾਜਾ ਵਰਦਾ ਹੀ ਰਹੀ ਹਾਂਜੀ ਤੇ ਦਾ ਠੀਕ ਹੈ ਜੀ ਇਹ ਜਉਣਾ ਬਦਲ ਲੈ ਬਾਥਰੂਮ ਚ ਜਾ ਕੇ ਉਹਨੇ ਜਾ ਕੇ ਕਪੜੇ ਬਦਲੇ ਹੁੰਦਾ ਹੈ ਬਸ ਠੀਕ ਜਾ ਕੇ ਆਪਣੀ ਦ੍ਰਿਸ਼ਟੀ ਤੋਂ ਪਰੇ ਜਾ ਕੇ ਕਪੜੇ ਬਦਲ ਕਰਕੇ ਆ ਜਾਂਦਾ ਕੋਈ ਆਦਮੀ ਇਸ ਕਰਕੇ ਆਦਮੋ ਦੀ ਵਰਤੀ ਹੁੰਦੀ ਆਦਮੋ ਸਾਰੇ ਗ੍ਰਾਮ ਕਹਿੰਦੇ ਵਰਤੀ ਕ੍ਰਿਸ਼ਨ ਵੀ ਕਹਿੰਦਾ ਆਦਮੋ ਦੀ ਵਰਤੀ ਹਾਂ ਜੀ ਕੀ ਹੋਇਆ ਠੀਕ ਹੈ ਜੀ ਆ ਰੂਪਾ ਜਿਹੜਾ ਸਰੀਰ ਦਾ ਇਹਦਾ ਇਹਨੂੰ ਜਪਣ ਤੋਂ ਬਣ ਲੋ ਚਲੋ ਰੂਪ ਦੇਖੇਗੇ ਦੁਨੀਆ ਅੱਛਾ ਰੋਸ਼ਨੀ ਪਾਤੀ ਆ ਕੁਦਰਤ ਇਹ ਵਿਖਾਲੀਆਂ ਜਿੰਨ ਐਵਡ ਪਿੰਡ ਠਣ ਕਿਉਂਣ ਆ ਜਿੰਨੇ ਬੜਾ ਸੰਸਾਰ ਬਣਾਇਆ ਨਾ ਹਾਂਜੀ ਉਦਰ ਦਾ ਦਰਸ਼ਨ ਹੋ ਗਿਆ ਕਾਦਰ ਦਾ ਕਦਰ ਵਿਚੋਂ ਦਰਸ਼ਨ ਗੁਜ਼ਰਾਤਾ। ਕਿ ਕੋਦਰ ਦਾ ਹਰ ਪਰ ਵਸੇ ਜਿਓ। ਹਾਂਜੀ। ਆ ਜੋ ਜੋ ਦਿਖ ਰਿਹਾ ਸਾਨੂੰ ਕੋਦਰ ਜੋ ਹੋ ਰਿਹਾ। ਜੋ ਬਰਤ ਰਿਹਾ ਤੇਰਾ ਬਾਣਾ। ਠੀਕ ਗੁਜ਼ਰਦਾ। ਹਾਂਜੀ। ਕੋਦਰ ਵਿੱਚ ਕਾਦਰ ਵਸਦਾ ਇਹ ਜੀ ਇਹ ਦਿਖਾਤਾ। ਇਹ ਉਹ ਸਾਰਾ ਸੰਸਾਰ ਬਣਾਇਆ। verdad ko verdad koi ghad bhi hai to qadr bhi hai ga phir theek hai ji kehni shakti hai jada shakti da malik o bhi ta hai ਆ ਗਿਆ ਛੱਡ ਦੋ ਬਿਨਾ ਸ਼ਕਤੀ ਤੋਂ ਕੋਈ ਬੰਦੀ ਨਹੀਂ ਰਹਿ ਸਕਦੀ ਉਹ ਹਾਂਜੀ ਉਹ ਤਾਂ ਖੜ ਜਾਂਦੀ ਹੈ ਫ੍ਰਿਕਸ਼ਨ ਨਾਲ ਹਾਂਜੀ ਆ ਗਈ ਮਤਲਬ ਹੈ ਉਹਨਾਂ ਸਮਝ ਵੀ ਚਾਹਦਾਂ ਦੀ ਹੈ ਤੇ ਕੀ ਨਹੀਂ ਰਹਿ ਸਕਦੀ ਕੁਦਰਤ ਇਹ ਵੇਖਾਲੀ ਜਿਨ ਪਿੰਡ ਠਿੰਕਿਓਣ ਤੇ ਐਵਰਡ ਪਿੰਡ ਦਾ ਮਤਲਬ ਵੀ ਐਡਾ ਵੱਡਾ ਪਿੰਡ ਜਿਹੜਾ ਸੰਸਾਰ ਹੈ ਸੰਸਾਰ ਬਿੰਦ ਹੈ ਔਰ ਕੀ ਹੈ ਠਣਕਿਆ ਕਿਹਨ ਦਾ ਜੀ ਰੇਰੂ ਪਿੰਡ ਹੈ ਕਹਿੰਦਾ ਜੀ ਠਣਕਿਆ ਹੋਂ ਦਾ ਅੱਛਾ ਜੀ ਅੱਛਾ ਤੇ ਇਹਦਾ ਕੋਈ ਅੱਖਰ ਕਿੱਥੋਂ ਆਇਆ ਇਹਦਾ ਕੋਈ ਇਹ ਕੋਈ ਪੰਛੀ ਹੈ ਵਗੈਰਾ ਹਾਂਜੀ ਅਖਰ ਝਲਕਾਂ ਕੇ ਆਂ ਲੰਕਾ ਕੇ ਦੇਖ ਲੋ ਠੀਕ ਹੈ ਜੀ ਆਪ ਸੱਚ ਕੀਆ ਸਭ ਸੱਚ ਹਾਂਜੀ ਕੋਈ ਕਾਇ ਕਦੇ ਵੀ ਜਿਹੜੀ ਠੀਕ ਹੈ ਤੇ ਬੱਚਾ ਲੱਗਿਆ ਸਰ ਜਾ ਕੇ ਫੇਰ ਬੜਾ ਲੱਗੀ ਉਹ ਸੱਚ ਹੈ ਝੂਠ ਹੈ ਠੀਕ ਹੈ ਉਹ ਝੂਠ ਤਾਂ ਗਿਆ ਮਾਇਆ ਤੂੰ ਹਮੇਸ਼ਾ ਰਹਿਣ ਵਾਲੀ ਨਹੀਂ ਹੈ ਠੀਕ ਹੈ ਜੀ ਝੂਠ ਦਾ ਲਵੇ ਇਹ ਠੀਕ ਹੈ ਜੀ ਹਮੇਸ਼ਾ ਰਹਿਣ ਵਾਲੀ ਹੈ ਇੱਕ ਦਾ ਉਹ ਝੂਠ ਨਾਲ ਵੀ ਉਹ ਹੈ ਉਹ ਠੀਕ ਹੈ ਲੈਹਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਸਿੱਕਿਓਣ ਲੈਣੇ ਧਰਿਓਣ ਛਤਰ ਸਿਰ ਛਤਰ ਕੀ ਰੱਖਿਆ ਛਤਰ ਕਾੜਾ ਰੱਖਿਆ ਅਸਾਰਾ ਸਮੁੰਦਰ ਛਤਰੇ ਜੱਤਾ ਦੇ ਸਰਤੇ ਅੱਛਾ ਜੀ ਅਜੇ ਨਾਲ ਹਾਂਜੀ ਇਹਦੇ ਨਾਲ ਢੱਕ ਦਿੱਤਾ ਉਹ ਤੇ ਏਡੀ ਬੜੀ ਬੁੱਧੀ ਕਰਦੀ ਉਹਦੀ ਏਡਾ ਬੜਾ ਗਿਆਨ ਕਰਦਾ ਕੁਝ ਨਹੀਂ ਸਰ ਜੀ ਜਿਹੜਾ ਆਦਮੀ ਉਪਰ ਦਾ ਜਿਹੜਾ ਆਦਮੀ ਦਾ ਖਰੀਦ ਉਹ ਛੱਤਰ ਉੱਡਾਈ ਹੋ ਜੀ ਨਾ ਡਰਿਆ ਜਾਵੇ ਹਾਂਜੀ ਜਦੋਂ ਆਪਣੇ ਲਈ ਛੱਤਰ ਅਸੀਂ ਹੱਥੀ ਦੇ ਲਈ ਆਤੀ ਦਾ ਸਾਰੇ ਭਜੂਗਾ ਗੱਲ ਠੀਕ ਹੈ ਜੀ ਅਖੀਰ ਸਰ ਸੱਤੇ ਆਜੂ ਦੋਵੇਂ ਦੋਨ ਬਾਕੀ ਤਾਂ ਜੂ ਹਾਂਜੀ ਉਹਦੇ ਛੱਤਰ ਵੀ ਵੜਾਈ ਚਾਹੀਦਾ ਰੋ ਹੱਤੀ ਦੇ ਜਿਹੜਾ ਉਹ ਬੱਚੇ ਉਹਦੇ ਨਾਲ ਹਾਂਜੀ ਇਹ ਗੱਲ ਹਾਂਜੀ ਜਿਹੜੀ ਪਹਿਲੀ ਬੁੱਧੀ ਹੁੰਦੀ ਹੈ ਦਰਾਪਤੀ ਹੁੰਦੀ ਹੈ ਉਹ ਅੱਛਾ ਜੀ ਅਨੁਪਤਰ ਦਰਾਪਤੀ ਹੁੰਦੀ ਹੈ ਕਿਵੇਂ ਉਹ ਸੀ ਦਰਾਪਤੀ ਸੀ ਉਹ ਅੱਛਾ ਜੀ ਜਿਹੜੀ ਕਾਂਗਰੋ ਲੋਬੋ ਘਾਰ ਲਈ ਬੈਠੀ ਹੁੰਦੀ ਹੈ ਬੁਰੇ ਪਰ ਅੰਦਰੋਂ ਨਹੀਂ ਘੜਦੀ ਅੱਛਾ ਜੀ ਜਿਹਨੇ ਰਾਖੀ ਵੀ ਪਤੀ ਬਣਾ ਲਿਆ ਆਪਣੇ ਇਹਨਾਂ ਬੰਦਾ ਨਹੀਂ ਕਹੀ ਸੀ ਵੀਰ ਬੁਰੇ ਜੇ ਤਰੋ ਪਤੀ ਬੁਰੇ ਪਤੀ ਭੈੜੇ ਪਤੀ ਵਾਲੀ ਅੱਛਾ ਜੀ ਜਿਵੇਂ ਹੋਵੇ ਹਾਂਜੀ ਦਗਣ ਹੋਣ ਲੱਗੀ ਹਾਂਜੀ ਸਾਚੂੜ ਦਾ ਪਾਣੀ ਉੱਪਰ ਲੱਗਿਆ ਤਾਂ ਉਹਦੇ ਸਿਰ ਦੇ ਕੀ ਰੇਤਾ ਉੱਬਰ ਦੇਤਾ ਜਿਵੇਂ ਲੈ ਲੇ ਦੇਤਾ ਉੱਬਰ ਠੀਕ ਹੈ ਜੀ ਪਹਿਲੇ ਦੀ ਬੱਸ ਥੋੜੀ ਸੀ ਠੀਕ ਹੈ ਜੀ ਥੋੜਾ ਗਿਆ ਸੀ ਸਾਰਾ ਗੰਦ ਦੇਤਾ ਠੀਕ ਹੈ ਜੀ ਲੋਕ ਦਾ ਕਹਿਣ ਦੇਤਾ ਸਾਰਾ ਹੀ ਖਤਰ ਦੇਤਾ ਦਾ ਕੀ ਮਤਲਬ ਹੁੰਦਾ ਜੀ ਅਸਨਾ ਤਬੂ ਵਰਗਾ ਜੱਤਰ ਦੇਤਾ ਅੱਛਾ ਛਿੱਕੇ ਹੁੰਨ ਛਿੱਕੇ ਦਤ ਹੁੰਦੇ ਅੱਛਾ ਜੀ ਮੁੱਖਾ ਖੇ ਹੁੰਦਾ ਹੁੰਦਾ ਤੇ ਹਾਲਾਲੇ ਨਾ ਹੀ ਪਾਸੇ ਤੋਂ ਕੱਢ ਕੇ ਤਬੂ ਦੇਤਾ ਠੀਕ ਹੈ ਜੀ ਛਿੱਕੇ ਛਿੱਕੇ ਦੇਤਾ ਹੁੰਦੇ ਜਦੋਂ ਦੀ ਦਰਸ ਹੋ ਜਾਏ ਜੀ ਤੇ ਅੱਗੇ ਕਹਿੰਦੇ ਆ ਜੋ ਤਬੂ हां जी ठीक है जी हां ते है तेरे सिग्नेचर ते बाल पहनदा ज्योत समाणी ज्योत माहे आप आपै सेती में क्यों ज्योत ज्योती ज्योती ज्योत अच्छा जी आप जेड़ा सीदा ओदा अपना आपा शरीर जेड़ा सी हां जी ਸ਼ਬਦ ਵਿੱਚ ਸਮਾ ਗਈ ਜੋਤ ਜੋਤ ਚ ਮਾਨ ਉਹ ਆਪਣੇ ਮੂਰਚੇ ਸੁਭਦ ਗਿਆ ਅੱਛਾ ਜੀ ਸੁਰਤ ਕਿਲਾਜਰ ਸੁਰਤ ਸ਼ਬਦ ਵਿੱਚ ਨਹੀਂ ਸਮਾਉਂਦੀ ਉਹ ਸੁਰਤ ਕਿੱਥੇ ਆਵੇ ਹਾਂਜੀ ਸੁਰਤ ਸ਼ਬਦ ਵਿੱਚ ਸਮਾ ਠੀਕ ਹੈ ਜੀ ਉਧਰ ਕਾਬਲ ਆ ਗਈ ਹਾਂਜੀ ਜੋ ਜੋ ਨੋਤੀ ਕਹਿੰਦਾ ਮਾਨ ਜਿਹੜਾ ਚਿੱਤ ਮਿੱਕਾ ਸਮਝਾ ਲਿਆ ਹਾਂਜੀ ਜੋ ਸਮਝਾਈ ਗਈ ਦੋਰੇ ਪੋ ਗੇ ਠੀਕ ਹੈ ਜੀ ਤਾਂ ਜਿਹੜਾ ਆਇਆ ਕਿਆ ਨੁਕਾ ਸ਼ਬਦ ਨਾਲ ਠੀਕ ਹੈ ਜੀ ਅ ਇਹ ਦਾ ਮਤਲਬ ਹੈ ਮਿੰਟ ਹੋ ਗਿਆ ਤੇ ਰੰਗ ਦਾ ਦਾਣਾ ਰੰਗ ਰੰਦਾ ਠੀਕ ਹੈ ਜੀ ਤਾਂ ਕਾਂ ਫੇਰ ਖੜ ਜਾਂਦਾ ਸ਼ਬਦ ਵਿੱਚ ਸਮਝਾ ਲਿਆ ਫੇਰ ਵੀ ਥੋੜੀ ਛੋੜਦਾ ਮਿੱਕ ਕਿਉਂ ਦਾ ਮਤਲਬ ਹੈ ਵੀ 1 ਮਿੰਟ ਹੋ ਜੀ ਇੱਕ ਬਿਲਕੁਲ ਉਸ ਜੱਜ ਜੱਜ ਸ਼ਬਦ ਦੇ ਵਿੱਚ ਹੀ ਇੱਕ ਆਦੀ ਦਾਸ ਬੋਲਦੇ ਨੇ ਉਹਦਾ ਸ਼ਬਦ ਵੀ ਉਹਦੇ ਵਿੱਚ ਹੀ ਲੱਗ ਗਿਆ ਹੋ ਗਿਆ ਠੀਕ ਹੈ ਇੱਕ ਬਿਲਕੁਲ ਹੋਣੀ ਹਾਂਜੀ ਹੋਰ ਜਿਹੜੀ ਸੀ ਜਿਹੜੀ ਸੁਰ ਕਰਦੀ ਇੱਕ ਬਿਲਕੁਲ ਹੋਗੀ ਸੁਰ ਠੀਕ ਹੈ ਜੀ ਸਿੱਖਾ ਪੁੱਤਰਾ ਕੋਖ ਕੈ ਸਭ ਵੇਖੋ ਜੇ ਕਿਉਂ ਨਾ ਜਬਰਾਂ ਦੇ ਦੇਖਣ ਹੋਸੀ ਗੰਦਾ ਹੀ ਹੋਸੀ ਆ ਜਦੋਂ ਦੱਬਾ ਜਾਂਦੀ ਹਾਂ ਹਾਂਜੀ ਜਦੋਂ ਗੰਦਾ ਜਾਂਦੀ ਉਧਰ ਵੀ ਚਲਦੀ ਠੀਕ ਹੈ ਜੀ ਇੱਕਦਮ ਹੋ ਗਈ ਠੀਕ ਹੈ ਜੀ ਇਹ ਕਲੀਅਰ ਹੋ ਗਿਆ ਜੀ ਸਿਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਉਂਣ ਆ ਸਿਖਾਂ ਰੂ ਵੀ ਕੋ ਖਿਆ ਪੁੱਤਰਾ ਰੂ ਵੀ ਕੋ ਖਿਆ ਵੀ ਰਾਂਝਾ ਪਵਾਰੀ ਕਿਰੋ ਤਵ ਅੱਛਾ ਜੀ ਤਾ ਉਹ ਤੋਂ ਤੇ ਵੇਖ ਲਿਆ ਕੋ ਕੁ ਦਿੱਤਾ ਤਾੜੇ ਲੋਕੇ ਅੱਛਾ ਜੀ ਹਾਂ ਨੂੰ ਦਸਾ ਕੇ ਦੇਖ ਕੇ ਤਾਂ ਦਿੱਤੀ ਹੈ ਅਬਲੀ ਵਰਦੀਰ ਠੀਕ ਹੈ ਜੀ। ਭਾਰਾਂ ਕੇ ਤਸੱਲੀ ਹੋਈ ਹੈ ਆਹ ਠੀਕ ਹੈ ਫੈਸਲਾ। ਅੱਛਾ ਜੀ। ਹਾਂ। ਜਾਂ ਸਦੋ ਉਹ ਕਿੱਥੇ ਕੋਹ ਕਰਕੇ ਸਿੱਕੇ ਸਿੱਕੇ ਰਾਇਦੇ ਨੇ ਕੱਲ ਗਏ ਜੰਗਲੀ ਠੀਕ ਹੈ ਜੀ। ਜਾਂ ਸਦੋ ਓਸ਼ਤਾ ਲੈਣਾ ਟਿਕਿਓਣ। ਠੀਕ ਹੈ ਜੀ। ਸਾਡਾ ਸ਼ੁਧ ਹੋ ਗਿਆ, ਸ਼ੁਧ ਹੋ ਉਸ। ਬਸ ਰਹਿਣਾ ਟਿਲ ਗਿਆ। ਉਧਰ ਤਾਂ ਲੈਣ ਦਾ ਟਿਲ ਗਿਆ, ਉਧਰ ਉਹਨੇ ਉਦੇ ਕਰਤਾ, ਅਲਾਨ ਕਰਦਾ ਵੀ ਰਹਿਣਾ ਬਾਈ ਟੈ ਗਿਆ, ਇਹ ਦਰੂਗਾ ਉਹਨਾਂ ਦਾ ਕੰਮ। ਠੀਕ ਹੈ ਜੀ। ਲੈ ਜੀ ਉਹਦੇ ਖਰੇ ਆਪਣੇ ਤੋਂ। ਠੀਕ ਹੈ ਜੀ। ਆਪਣੇ ਤੋਂ ਟਿਕਦਾ ਵੀ ਮੇਰੇ ਤੋਂ ਇਹ ਕਰੂਗਾ। ਅੰਮਕਲ ਨਹੀਂ ਆਦੂ ਟਿਕਦਾ ਉੱਤਕ। ਸੱਚੋ ਤੋਂ ਹੋ ਗਿਆ ਨਾਨ ਕਰੇ ਦੇਖ ਲੈ ਵੀ ਲੈਣਾ ਬਿਲਕੁਲ ਸ਼ੁੱਧ ਹੈ ਤੇ ਤੋਂ ਇਹ ਲੈਣਾ ਕਿ ਕਿਉਂ ਹੈ ਹਾਂਜੀ ਉਹਦੇ ਦਿਖਾ ਆਇਆ ਠੀਕ ਹੈ ਜੀ ਇਹ 2000 ਦਊਗਾ ਠੀਕ ਹੈ ਬਲਵੰਡ ਨੇ ਵੀ ਗੱਲ ਫੇਰ ਪਹਿਲਾਂ ਸੱਤੇ ਨੇ ਕਨਫਰਮ ਕੀਤੀ ਹੈ ਭਾਈ ਸੱਤੇ ਨੇ ਹੁਣ ਭਾਈ ਬਲਵੰਡ ਨੇ ਵੀ ਇਹਨੂੰ ਦੁਬਾਰਾ ਕਨਫਰਮ ਕਰਦਾ ਦੋਏ ਉੱਤਰ ਅੱਛਾ ਜੀ ਰਾਤ ਦਾ ਤੋਂ ਇਖਲਾਸ ਹੋ ਗਿਆ ਠੀਕ ਹੈ ਜੀ ਕਿਹਦਾ ਹਿਰਦਨ ਬੇਗਾਨਾ ਬੀ ਕੋਕੋ ਲਾਇਆ ਸੀ ਤਾਂ ਬੰਦਾ ਨਹੀਂ ਅੱਛਾ ਜੀ ਠੀਕ ਹੈ ਅੱਛਾ ਜੀ ਹੁਣ ਆਪਣੀਆਂ ਪੌੜੀਆਂ ਚਾਰ ਹੋ ਗਈਆਂ